ਰਾਮ ਕਲੀਤੀਵਾਰ ਮਹੱਲਾ ਪੰਜਵਾਂ ੴ ਸਤਿਗੁਰ ਪ੍ਰਸਾਦਿ ਸ਼ਲੋਕ ਮਹੱਲਾ ਪੰਜਵਾਂ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭ ਹਰ ਦਰਗਾ ਕਾ ਬਸੀਠ ਪਹਿਲਾਂ ਸੁਣਿਆ ਸੀ ਨਾ ਪਰ ਪਣ ਜਪਾ ਸੁਣਦੇ ਆ ਤੁਸ ਸੁਣਦੇ ਆ ਜਦੋਂ ਦਰਸ਼ਨ ਹੋਇਆ ਅੰਦਰੋਂ ਸਤਗੁਰ ਦਾ ਸਤਗੁਰ ਦੀ ਗੱਲ ਚਲਦੀ ਹੈ ਸਤਗੁਰ ਤੇ ਖਾਲੀ ਕੋਈ ਨਹੀਂ ਪਰ ਮੇਰੇ ਪ੍ਰਭ ਮੇਲ ਮੁਲਾਇ ਸਤਗੁਰ ਦੀ डेफिनेशन ਹੈ ਨਾ ਇੱਕ ਕੀ ਸੁਣੀ ਸੀ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਬਨਾਸੀ ਪੁਰਖਾ ਸਮੈ ਰਹਾ ਸਮੈ ਇਹਦਾ ਵੀ ਨਿਸ਼ਾਨ ਸੀ ہاں ਲੱਭਿਆ ਵੀ ਅਧਰੁਈਆ ਇਹ ਵੀ ਠੀਕ ਹੈ ਇਹ ਵੀ ਸੁਣਿਆ ਸੀ ਔਰ ਉਹਦਾ ਜਾਂਦਾ ਵੀ ਕਿਤੇ ਨਹੀਂ ਨਾ ਆਵੇ ਨਾ ਜਾਏ ਜਾਣਾ ਕਿੱਥੇ ਉਹਨਾਂ ਕਿਧੋ ਕਿਉਂਕਿ ਸੁਖ ਸਾਗਰ ਵੀ ਇੱਥੇ ਹੈ ਭਗ ਸਾਗਰ ਵੀ ਇੱਥੇ ਹੈ ਦੋਏ ਜਲਾ ਰਹੇ ਨੇ ਕਿੰਨੇ ਲੋਕ ਵੀ ਹੈ ਚੀਨਾ ਚੌਥਾ ਲੋਕ ਤਾਂ ਹੈ ਹੀ ਹੈ ਚੌਥੇ ਲੋਕ ਦੇ ਵਿੱਚ ਹੀ ਨੇ ਇਸ ਕਰਕੇ ਜਾਣਾ ਆਉਣਾ ਵੀ ਐਵੇਂ ਭਰਵੇਂ ਚਲਣਾ ਆਉਣਾ ਕਿਤੇ ਨਹੀਂ ਪਿਛੜਿਆ ਮੇਲੇ ਪ੍ਰਭੂ ਵਿਛੜਿਆ ਨੂੰ ਪ੍ਰਭੂ ਮੇਲਦਾ ਹਰ ਦਰਗਾਹ ਖਾਪੈ ਸੀਟ ਜਿਹੜਾ ਬਾਸਾ ਬੈਠਦਾ ਦਾ ਮਤਲਬ ਬੈਠਣ ਦਾ ਨਾ ਰਹਿਣ ਦਾ ਨਾ ਬੈਠ ਸੀਟ ਬਸਿਆ ਹੋਇਆ ਜਿੱਥੇ ਉਹ ਬਸਦਾ ਕਿੱਥੇ ਨਾਨਕ ਬੱਧਾ ਘਰ ਕਹਾਂ ਜਾ ਮਰ ਜਨਮ ਜਰਾ ਉਹ ਤੇ ਰਹਿੰਦਾ ਹੁੰਦਾ ਜਿੱਤਨਾ ਬਹੁਤ ਹੈ ਨਾ ਜਨਮ ਨਾ ਜਰ ਰੋ ਨਾ ਪ੍ਰਾਣ ਔਰ ਉਹਦਾ ਦਰਸ਼ਨ ਵੀ ਉੱਥੇ ਜਾ ਕੇ ਹੁੰਦਾ ਉਸ ਵਸਤਾ 'ਚ ਹੁੰਦਾ ਠੀਕ ਆ ਨਾ ਵਸੀਤ ਬਸਣ ਵਾਲਾ ਨਹੀਂ ਵਿਛੜਿਆ ਮੇਲੇ ਪ੍ਰਭੂ ਮਹਾਰਾਜ ਜਿੱਤ ਦਾ ਮੇਲਾ ਪ੍ਰਭੂ ਬਾਣੀ ਦਿੱਤੀ ਹੈ ਲੋਕਾਂ ਨੇ ਤਾਂ ਇੱਕ ਉਹਨੇ ਜੇ ਤਰ ਬਾਣੀ ਤਾਂ ਇੱਕ ਹੋ ਗਈ ਤਾਂ ਹੀ ਦਰਸ਼ਨ ਹੋਇਆ ਜੇ ਕੋਈ ਨੇ ਹਾਂਜੀ ਦੂਰ ਦੂਰ ਤੇ ਦਰਸ਼ਨ ਕਿਵੇਂ ਹੋ ਜਾਂਦਾ ਇਹ ਸਤਿਗੁਰ ਜਿਹੜਾ ਹੈ ਉਹ ਮਨ ਔਰ ਚਿੱਤ ਜਿਹੜੇ ਵਿਛੜੇ ਹੋਏ ਆ ਉਹਨਾਂ ਨੂੰ ਪ੍ਰਭੂ ਤੱਕ ਮਿਲਾ ਜੀ ਹਾਂਜੀ ਹਾਂਜੀ ਤੇ ਹਰ ਦਰਗਾ ਕਾਬਸੀਟ ਕਹਿੰਦਾ ਭਾਵ ਉਹਦੀ ਉਹਦਾ ਸਥਾਨ ਕਿੱਥੇ ਆ ਮਿਲਣ ਦਾ ਦਰਗਾ ਦੇ ਵਿੱਚ ਰਹਿੰਦੇ ਨੇ ਉਹ ਤੇ ਹਿਰਦੇ ਨੂੰ ਦਰਗਾ ਕਿਹਾ ਜੀ ਨਹੀਂ ਕੋ ਹਿਰਦੇ ਦਾ ਉਹ ਹਿੱਸਾ ਜਿਹੜਾ ਸਚਿਆਰ ਜਿਹਨੂੰ ਅਸੀਂ ਟਟ ਕਹਿੰਦੇ ਆ ਉਹ ਹਿੱਸਾ ਜਿਹੜਾ ਹੈਗਾ ਸਚਿਆਰ ਹਿੱਸਾ ਜਿਹੜਾ ਸਚਿਆਰ ਵੀ ਹਿੱਸਾ ਹੈ ਸਾਡੇ ਸਾਰੇ ਝੂਠਿਆਰਾ ਹਿਸਕੂੜਿਆਰਾ ਜਿੰਨਾ ਕੂੜਿਆ ਆ ਉਹ ਖਤਮ ਕਰਕੇ ਸਾਰੇ ਸਤਿਆਰਾ ਹੁਣ ਸੁਣ ਦੀ ਗੱਲ ਐ ਜਿੱਥੇ ਪਰਮਾ ਉਥੇ ਕੂੜਿਆਰ ਪਣ ਜਿੱਥੇ है ਦਾ ਕੂੜਿਆਰ ਪਣ ਜਿੱਥੇ ਰੋਸ਼ਨੀ ਐ ਉਥੇ ਸਤਿਆਰ ਪਣ ਤੇ ਛਿਆਰਾ ਹੋਣਾ ਸਾਰਾ ਸਚਾਨ ਪਣ ਸੱਚਾ ਝੂਠ ਦਾ ਮਿਕਸਚਰ ਐ ਮਨ ਝੂਠਾ ਮਨ ਕਰਕੇ ਨਾਨਕ ਸਤਗੁਰ ਤੇ ਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ ਹਰ ਨਾਮੋਂ ਮੰਤਰ ਦੁਲਾਇ ਦਾ ਮੰਤਰ ਕਿਹੜਾ ਦ੍ਰਿੜ ਕਰਾਉਂਦਾ ਹਰ ਨਾਮ ਦਾ ਉਹ ਦੁਖੁਰ ਗਿਆਨ ਦਾ ਮੰਤਰ ਨਾਮ ਹਰ ਕੌਣ ਕਿਤੇ ਰੰਦਾ ਉਹ ਮੰਤਰ ਦ੍ਰਿੜ ਕਰਾਉਂਦਾ ਸਮਝਾਉਂਦਾ ਛੁੱਟਣ ਵਿਧੀ ਹੈ ਗੁਰਬਾਣੀ ਇਹ ਜਿਹੜਾ ਕਰਾਉਂਦਾ ਇਹ ਛੁੱਟਣ ਵਿਧੀ ਹੈ ਇਹ ਜਿਹੜਾ ਭਵਸਾ ਕਰੇ ਜੋ ਕਮੇਡ ਕੜਨਾ ਇਹ ਮੰਤਰ ਦ੍ਰਿੜ ਕਰਾਉਂਦਾ ਕੱਟੇ ਹੋ ਮੇ ਰੋਗ ਹੋ ਮੇ ਰੋਗ ਨੂੰ ਕੱਟ ਦਿੰਦਾ ਜਨਾ ਜਲ ਹੋ ਮੇ ਰੋਗ ਨਹੀਂ ਕੱਟਦਾ ਉਹਦਾ ਜਿਹੜੇ ਨਾ ਬੰਦਾ ਕੇ ਹੋ ਰੋਗ ਤਾਂ ਨਾ ਮੰਨਦਾ ਬਾਅਦ ਚ ਮੰਨਦਾ ਗੰਨੋਂ ਨਹੀਂ ਸੱਚ ਨੂੰ ਪਹਿਲਾਂ ਮੰਨਦਾ ਨਹੀਂ ਗੁਰਵਾਨ ਨੂੰ ਨਹੀਂ ਬੰਦਾ ਜਿਨਾ ਜੀ ਹੋ ਰੋਗ ਕਟਿਆ ਨਾ ਜਾਵੇ ਨਾਨਕ ਸਤਗੁਰ ਤੇ ਮਿਲਿਆ ਜਿਹੜਾ ਧੁਰੇ ਪਿਆ ਸਜੋ ਸਤਗੁਰ ਉਹਨਾਂ ਨੂੰ ਮਿਲਿਆ ਬੰਦੇ ਨਾਲ ਜਾਣਾ ਹੈ ਇਹਨਾਂ ਦਾ ਤੁਰ ਸੰਯੋਗ ਹੋ ਗਿਆ ਜੋਗ ਹੈ ਜੋਗੀ-ਸ਼ੋਗ ਦੀ ਗੱਲ ਕਰਦੇ ਨੇ ਸੰਯੋਗ ਹੈ ਜੋਗ ਤੋਂ ਅੱਗੇ ਹੈ ਫੋਨਮਨਾਲ ਜੋਗ ਸੰਯੋਗ ਦਾ ਮਤਲਬ ਹੈ ਆਪਣੇ ਮੂਲ ਨਾਲ ਜੋਗ ਫੋਨਮਨਾਲ ਜੋਗ ਇਹ ਕੌਣ ਮਿਲਾਇਆ ਕੀ ਭਾਵੇਂ ਜੀ ਸਤਗੁਰ ਵੀ ਉਹਨਾਂ ਨੂੰ ਬਿਲਾਇਆ ਨੂੰ ਉਹੀ ਸਤਗੁਰ ਤੱਕ ਪਹੁੰਚੇ ਨੇ ਵੀ ਅਚਾਨਕ ਮਿਲ ਆਯਾ ਪੜਾਂਗੇ ਸਤ ਨਾਨਕ ਸਤ ਗੁਰ ਤੇ ਨਾ ਮਿਲ ਆਇਆ ਹੈ ਜੀ ਮਿਲ ਆਇਆ ਹਾਂ ਜਿਹੜਾ ਦਾਰਗਾਹ ਨਾਲ ਸੰਯੋਗ ਪੈ ਗਿਆ ਨਾ ਸਿੱਧਾ ਜਾਨੀ ਧੁਰ ਕੀ ਬਾਣੀ ਨਾਲ ਗੁਰਬਾਣੀ ਹੈ ਨਾ ਇਹ ਬਾਣੀ ਦਰਗਾਹ ਨਾਲ ਸੰਯੋਗ ਬਣਾ ਦਿੰਦੀ ਹੈ ਆਪਾਂ ਕਹਿੰਦੇ ਆ ਨਾ ਮੰਨਦੇ ਆ ਨਾ ਬੁਲਾਇਆ ਬੋਲੇਆ ਹਾਂ ਜੀ ਸਭ ਇੰਨੀੋ ਗੱਲ ਹੈ ਜੇ ਵਿਸ਼ਵਾਸ ਹੈ ਸਾਨੂੰ ਬੁਲਾਇਆ ਬੋਲੇਆ ਇਹ ਬਾਣੀ ਦਾ ਧੁਰ ਰਿਸ਼ਤਾ ਜੋੜ ਦਿੰਦੀ ਆਪਣਾ ਆਦਮੀ ਨਾਲ ਹੀ ਰਿਸ਼ਤਾ ਲੈਣ ਦਿੰਦੀ ਬੋਲਣ ਵਾਲੇ ਨਾਲ बोली जाए किसे ने आवे फरवाणी ओदे ਨਾਲ ਹੀ ਜੋ ਹੁੰਦੇ ਦੀਏ ਬਾਣੀ ਆ ਮਤਲਬ ਹੈ ਉਹਨੂੰ ਵਿੱਚੋਂ ਕੱਟ ਕੇ ਧਰੇ ਜੋੜਨਾ ਆਦਮੀ ਦੇ ਥਰੂ ਨਹੀਂ ਜੋੜਨਾ ਜੀ ਬੋਲੀ ਹੈ ਫਿਰ ਤਾਂ ਇਹਨੇ ਭਗਤਾਂ ਦੀ ਬਾਣੀ ਹੈ ਕਿਤੇ ਕਿਤੇ ਨਾ ਜੁੜਦੇ ਰਹਾਂਗੇ ਇਹਨੇ ਬੰਦੇ ਦੀ ਬਾਣੀ ਹੈ ਕਿਤੇ ਦੀ ਨਾ ਜੁੜਾ ਕੇ ਕਿਤੇ ਨਹੀਂ ਜੁੜਾ ਕੇ ਗਲਤੀ ਕੀਤੀ ਹੈ ਨਾ ਵਾਲੇ ਨਾਮ ਦੇ ਬਣ ਕੇ ਅਸੀਂ ਨਾਨਕਾਂ ਨਾਲ ਜੁੜ ਗਏ ਕੋਈ ਗੁਰੂ ਜਿੱਥੇ ਜੁੜ ਗਿਆ ਕੋਈ ਕਿਸੇ ਨਾਲ ਜੁੜ ਗਿਆ ਕੋਈ ਕਿਸੇ ਨਾਲ ਜੁੜ ਗਿਆ ਜਿਹੜਾ ਜੋੜਿਆ ਗੁਰਬਾਣੀ ਨੇ ਉਹਦੇ ਨਾਲ ਕੋਈ ਨਹੀਂ ਜੋੜਿਆ ਕਿਤੇ ਗੁਰਬਾਣੀ ਜੋੜਦੀ ਆ ਉੱਥੇ ਕੋਈ ਨਹੀਂ ਜੋੜਿਆ ਇਹ ਬਖਰੇਵਾ ਹੋਇਆ ਗੁਰਬਾਣੀ ਕਹਿੰਦੀ ਹੈ ਉਹ ਆਦਮੀ ਅਸੀਂ ਬਾਈਪਾਸ ਕਰਦੇ ਨਹੀਂ ਉਹਨੂੰ ਜਿਹੜਾ ਬੋਲ ਰਿਹਾ ਜਿਹਦੀ ਗੁਰਬਾਣੀ ਰਚੀ ਹੋਈ ਆ ਉਹਨੂੰ ਬਾਈਪਾਸ ਨਹੀਂ ਅਸੀਂ ਕਰ ਰਹੇ ਅਸੀਂ ਕਰ ਰਹੇ ਬਾਈਪਾਸ ਕਰਦੀ ਆਵੇਂ ਗੁਰਬਾਣੀ ਕਹੀ ਜਾਂਦੀ ਹੈ ਵੀ ਬਾਈਪਾਸ ਕਰੇ ਤੇ ਫਿਰ ਨਾ ਗੱਲ ਬਣਦੀ ਨਹੀਂ ਆਪਰਾ ਨੁਕਸਾਨ ਕਰੀਟਿਆ ਪਰ ਕਾਇਪਾਸ ਨਹੀਂ ਕਰਦੇ ਦੱਸੇ ਹਾਂਜੀ ਮਹੱਲਾ ਪੰਜਵਾਂ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਗੁਰਪੂਰੇ ਦੇਖਾਲਿਆ ਵਿਣ ਨਾਵੇਂ ਸਭ ਬਾਦ ਸੱਜਣਾ ਦਾ ਕੋਈ ਬਾਦ ਹੋਤਾ ਹੈ ਹੀ ਹੋਈ ਨਹੀਂ ਸੱਜਣ ਕਬੀਰ ਕਹਿੰਦਾ ਪ੍ਰੀਤ ਇੱਕ ਸਿਮ ਕੀ ਹੈ ਅੰਧੁਭ ਦਾ ਜਾਏ ਪ੍ਰੀਤ ਹੋਏ ਕਿ ਨਾ ਸਕਦੀਏ ਦੋ ਨਾ ਕਿਵੇਂ ਹੋ ਸਕਦੀਏ ਪ੍ਰੀਤ ਸੱਜਣ ਕੌਣ ਹੈ ਪਹਿਲਾਂ ਕਹੇ ਸੱਜਣ ਉਹ ਨਹੀਂ ਜਿਹੜੇ ਚੱਲਦੇ ਨਾਲ ਚੱਲਣ ਉਹ ਤਾਂ ਫਿਰ ਚੱਲਦੇ ਨਾਲ ਚੱਲਣਾ ਤਾਂ ਧੋਈ ਨੇ ਜੇ ਤੇ ਬੰਦੇ ਨਾਲ ਲੈਂਦਾ ਵੰਨ ਜਿਤਨਾ ਲੈਣਾ ਹੋਰ ਤਾਂ ਸੱਜਣ ਕੋਈ ਨਹੀਂ ਹੈ ਜੀਵ ਦਾ ਸੱਜਣ ਜੀ ਆਤਮਾ ਦਾ ਸੱਜਣ ਤੇ ਅੰਦਰ ਇਹਦਾ ਸਤਗੁਰੂ ਇੱਕ ਸੱਜਣ ਜੇ ਸਤਗੁਰ ਸੱਜਣ ਤੂੰ ਸੱਜਣ ਸਵਾਮੀ ਭੋਰਾ ਜੀ ਸਵਾਮੀ ਸੱਜਣ ਆ ਫਿਰ ਦੁਨੀਆ ਸਾਰੀ ਸੱਜਣ ਕੋ ਆਦਮੀ ਉਹ ਸੱਜਣ ਅਸਲ ਤੇ ਸੱਜਣ ਆਦਮੀ ਨੂੰ ਸੱਜਣ ਜਿਹਾ ਬਣਾ ਲਿਆ ਤਾਂ ਸਾਰੇ ਸੱਜਣੇ ਹੀ ਬਣ ਗਏ ਸੋ ਉਹ ਜਾਸ ਤੇ ਨਿਰੰਦ ਅ ਕਿਸੇ ਹੋਰ ਨਾ ਬੈਰਗ੍ਰੋਧ ਦੀ ਬੈਰਗ੍ਰੋਧ ਹੀ ਜਾਸ ਬੰਦ ਹੋਗੀ ਸੱਜਣ ਸੱਚ ਨਹੀਂ ਗੁਨਾਹ ਹੈ ਬੈਰਗ੍ਰੋਧ ਕਾਮ ਕ੍ਰੋਧ ਲੋਭ ਉਹ ਸਭ ਗੁਨਾਹ ਹੋ ਗਿਆ ਕਿ ਸੰਗਤ ਚੋੜੀਏ ਸੱਜਣ ਦੀ ਉਹ ਕਟ-ਕਟ ਕੇ ਅੰਦਰ ਕੀ ਜਾਣਦਾ ਸੱਜਣ ਨਹੀਂ ਕੁਝ ਹੋ ਸਕਦੇ ਇਹਦੇ ਬਾਰੇ ਇੱਕ ਸੱਜਣ ਸਭ ਸੱਜਣ ਇੱਕ ਵੈਰੀ ਪਰ ਜੇ ਇੱਕ ਨਾਲੇ ਵਿਰੋਧ ਹੈ ਅੰਤਰਾਤਮਾ ਨਾਲੇ ਵਿਰੋਧ ਮੰਨਤਾ ਚਿਤ ਨਾਲੇ ਵਿਰੋਧ ਬਾਅਦ ਫਿਰ ਬਾਅਦ ਵਾਦ ਬਵਾ ਚ ਚਲ ਸਾਰੀ ਜਿੰਦਗੀ ਸਾਰੀ ਜਿੰਦਗੀ ਬਾਦ ਬਵਾ ਚ ਬਣਾ ਸਕਦਾ ਨਾ ਕਿਸੇ ਦਾ ਬਣ ਸਕਦਾ ਨਾ ਕਿਸੇ ਨੂੰ ਬਣਾ ਸਕਦਾ ਇੱਕ ਵੈਰੀ ਸਭ ਬਾਦ ਹਾਂਜੀ ਗੁਰਪੂਰੇ ਦੇਖ ਲਿਆ ਵਿਣ ਨਾਮ ਹੈ ਪੂਰੇ ਸਤਗੁਰ ਨੇ ਪੂਰੇ ਗਿਆਨ ਦੀ ਰੋਸ਼ਨੀ ਦੇਖਿਆ ਇਹ ਪੂਰੇ ਸਤਗੁਰ ਦੇ ਜਿਹਾ ਬਚਨ ਸੁਣਨੇ ਜਿਹਾ ਨਾਮ ਸਭ ਬਾਦ ਨਾਮ ਤੋਂ ਬਿਨਾ ਜੋ ਵੀ ਕੁਛ ਹੈ ਸਭ ਬਾਦ-ਵਿਵਾਦ ਦਾ ਵਿਸ਼ਾ ਹੈ ਰਾਜ ਕਰੇਗਾ ਖਾਲਸਾ ਬਾਦ-ਵਿਵਾਦ ਦਾ ਵਿਸ਼ਾ ਹੈ ਨਾਮ ਤੋਂ ਬਿਨਾਂ ਜੇ ਪਹਿਲਾ ਨਾਮ ਹੈ ਫੇਰ ਬਾਦ-ਵਿਵਾਦ ਦਾ ਵਿਸ਼ਾ ਨਹੀਂ ਹੋ ਸਕਦਾ ਨਾਮ ਪਹਿਲੀ ਚੀਜ਼ ਹੈ ਜਿਹੜੀ ਬਾਦ-ਵਿਵਾਦ ਹੋਂ ਤੋਂ ਬਚਾਉਗੀ ਸੰਸਾਰ ਨਾਮ ਤੋਂ ਬਿਨਾਂ ਬਾਦ-ਵਿਵਾਦ ਹੈ ਅੱਜ ਬਾਦ-ਵਿਵਾਦ ਵਿੱਚ ਕਿਉਂ ਹੈ ਸਿੱਖ ਆਪਸ ਵਿੱਚ ਨਾਮ ਹੈ ਵੀ ਨਾਮ ਨਹੀਂ ਹੈ ਨਾਮ ਤੋਂ ਸਖਣ ਨੇ ਇਹਨਾ ਸੰਭ ਨੇ ਨਾਮ ਜਪਦੇ ਨੇ ਜਪਉਂਦੇ ਨੇ ਬਾਦੋ ਬਾਤ ਸਾਂਤਾਂ ਦੇ ਵਿੱਚ ਆਪਣੇ ਵਿੱਚ ਇਹ ਇੱਕ ਵੇਲੇ ਇੱਕ ਹੈ ਉਹ ਨਾਮ ਨਹੀਂ ਹੈ ਜਿਹੜਾ ਹੁੰਦਾ ਉਹ ਉਹ ਨਾਮ ਤਾਂ ਗੁਰਬਾਣੀ ਚੋਂ ਰਿੜਕੇ ਤੇ ਹੀ ਪ੍ਰਾਪਤ ਹੋਣਾ ਗੁਰਬਾਣੀ ਦੇ ਵਿਚਾਰ ਚੋਂ ਹੀ ਪ੍ਰਾਪਤ ਹੋਣਾ ਹੈ ਬਿਨ ਨਾਮ ਐ ਸਭ ਨਾਮ ਕਰਕੇ ਨਾਮ ਤੋਂ ਬਿਨਾ ਮਾਇਆ ਮਾਇਆ ਬਸ ਬਸ ਦਾ ਵਿਚ ਹੈ ਹਾਂਜੀ ਸਾਖਤ ਦੁਰਜਨ ਭਰਮਿਆ ਜੋ ਲੱਗੇ ਦੂਜੇ ਸਵਾਦ ਜਦ ਨਾਨਕ ਹਰ ਪ੍ਰਭੁੁੱਜਿਆ ਪਾਸੇ ਤਾਂ ਸਾਖਤ ਹੈ ਆਦਮੀ ਹੈ ਰਾਜਾ ਰਾਜ ਤੋਂ ਹੈ ਹੁਕਮਾ ਆਜ਼ਮ ਕਰੀਬ ਬੈਠਾ ਦੁਨਕਾ ਸਭਾ ਉਹ ਇਕ ਤੋ ਹੈ ਇਕ ਇਕ ਪੰਕਤੀ ਵਿੱਚ ਸਾਖ ਤੇ ਦਰਜਨ ਭਰਮਿਆ ਸਾਖ ਤੇ ਦਰਜਨ ਦਾ ਭਰਮ ਚ ਪਿਆ ਹੋਇਆ ਵੀ ਮੇਰੇ ਹੁਕਮ ਜੰਦਾ ਜੋ ਲੱਗੇ ਦੂਜੇ ਸਾਧ ਮਾਇਆ ਦੇ ਸਾਥ ਚ ਫਸਿਆ ਹੋਇਆ ਨਾਨਕ ਹਰ ਪ੍ਰਭ 부ਝਿਆ ਨਾਨਕ ਕਹਿੰਦਾ ਕਿ ਜਾਨਾ ਹਰ ਕਾ ਜਾਨਾ ਹਰ ਪ੍ਰਭ 부ਝ ਲਿਆ ਉਹਨੇ ਆਪਣਾ ਅੰਦਰ ਖੋਜ ਲਿਆ ਉਹ ਕੀ ਢੂੰਢ ਢੁੰਢਿਆ ਹਰ ਸੱਜਣ ਲੋਦਾ RAM ਰਾਜੇ ਉਹਨੇ 부ਝ ਲਿਆ ਗੁਰ ਸਤਗੁਰ ਕਰੇ ਪ੍ਰਸਾਦ ਆਇੜਾ ਗਿਆਨ ਸਤਗੁਰ ਦਾ ਗੁਰਬਾਣੀ ਹੈ ਇਹਦੀ ਕਿਰਪਾ ਨਾਲ ਉਹ ਗੁਜਲੇ ਗੁਰਬਾਣੀ ਦੀ ਕਿਰਪਾ ਨਾਲ ਗੁਜਲੇ ਗੁਰਬਾਣੀ ਨੂੰ ਵਿਚਾਰ ਕੇ ਗੁਰਬਾਣੀ ਦੇ ਗਿਆਨ ਨਾਲ ਸਤਗੁਰ ਦੇ ਗਿਆਨ ਨਾਲ ਗੁਜਲੇ ਵਰਨਾ ਇਹੜਾ ਸਾਖਤ ਹੈ ਦਰਜਨ ਉਹ ਗੁਰਬਾਣੀ ਨੂੰ ਮੰਨਦਾ ਨਹੀਂ ਉਹ ਅਗੀ ਮੂਜਣਾ ਉਹਦਾ ਭਰਮਿਆ ਹੋਇਆ ਉਹ ਸੰਸਾਰੀ ਸੱਤਾ 'ਚ ਭਰਮਿਆ ਹੈ ਸੰਸਾਰੀ ਰਾਜਨੀਤੀ 'ਚ ਫਲਾਮਾ ਹੁੰਦੀਆਂ ਨੇ ਇਸੇ ਨਸ਼ੇ 'ਚ ਹਾਂਜੀ ਔੜੀ ਥਾਟਣ ਹਾਰੇ ਥਾਟ ਆਪੇ ਹੀ ਥਟਿਆ ਆਪੇ ਪੂਰਾ ਸ਼ਾਹ ਆਪੇ ਹੀ ਖੱਟਿਆ ਆ ਜਿਹੜਾ ਥਾਟ ਬਣਾਇਆ ਉਹ ਥਾਟ ਬਣਾਈ ਬੈਠੇ ਨੇ ਨਾ ਉਹ ਥਾਟ ਨੂੰ ਥਾਟ ਕਰਨ ਲੱਗੇ ਚਲ ਉਹਨਾਂ ਦਾ ਖਾੜੇ ਹੋਊਗਾ ਨਾ ਤੇ ਥਾੜੇ ਬਣਨਾ ਦਾ ਥਾਟ ਨਹੀਂ ਬਣਨਾ ਆ ਜਿਹੜਾ ਸਰੀਰ ਦਾ ਜੋੜ ਲਾਇਆ ਨਾ ਜੋੜ ਮਾਇਆ ਨੂੰ ਵਾਹ ਵਾਹ ਕਾ ਬੜਾ ਤਮਾਸ਼ਾ ਖਟਣਾ ਹਾਰੇ ਥਾੜ ਆ ਵੀ ਛਟਿਆ ਆਪ ਹੀ ਮਾਇਆ ਨਾਲ ਜੁੜਿਆ ਇਹ ਆਪ ਹੈ ਜੋੜ ਨਾਲ ਵੀ ਆਪ ਹੈ ਹੁਕਮ ਦਾ ਹੁਕਮ ਪਰਮੇਸ਼ਰ ਦਾ ਹੀ ਹੈ ਤਾਂ ਜੁੜਿਆ ਉਹਦਾ ਹੁਕਮ ਹੋਇਆ ਪਰ ਜੁੜਿਆ ਆਪ ਆਪ ਨੂੰ ਆਪ ਜੋੜਿਆ ਆਪੇ ਪੂਰਾ ਛਾਉ ਆਪੇ ਹੀ ਖਟਿਆ ਆਪਣੇ ਅੰਦਰ ਪੂਰਾ ਛਾਏ ਕਿਤਨ ਆਪੇ ਜੇ ਬਣ ਬਣਦਾ ਹੈ ਬੰਦੀ ਜਾਂਦਾ ਤਾਂ ਖੱਟੀ ਜਾਂਦਾ ਜੇ ਨਹੀਂ ਮੰਨਦਾ ਤਾਂ ਨਹੀਂ ਗੱਲਦਾ ਕੁਰਬਾਨੀ ਉੱਤ ਕਰਕੇ ਸਮਝੀ ਜਾਂਦੀ ਹੈ ਜਿੱਤ ਕਰਕੇ ਸਮਝੀ ਜਾਂਦੀ ਹੈ ਜੇ ਮਨ ਮੰਨ ਲੈਂਦਾ ਤਾਂ ਖੱਟੀ ਹੋ ਜਾਂਦੀ ਹੈ ਜੇ ਮਨ ਜਿਹੜੀ ਗੱਲ ਨਹੀਂ ਮੰਨਦਾ ਉਹ ਖੱਟੀ ਨਹੀਂ ਹੁੰਦੀ ਆਪੇ ਹੀ ਖਟੇ ਆਪੇ ਪੂਰਾ ਸਾਬ ਆਪੇ ਹੀ ਖਟਿਆ ਆਪੇ ਸਮਝਣ ਵਾਲਾ ਆਪ ਉਪਦੇਸ਼ ਸਮਝੇ ਆਪ ਉਪਦੇਸ਼ ਆਪਣੇ ਆਪ ਨੂੰ ਆਪਈ ਹੈ ਆਪੇ ਸਮਝਦਾ ਜੋ ਸਮਝ ਲੈਂਦਾ ਖਟ ਲੈਂਦਾ ਜੋ ਨਹੀਂ ਸਮਝਦਾ ਉਹ ਨਹੀਂ ਖੱਟੀ ਰਹਿ ਜਾਂਦੀ ਹਾਂਜੀ ਆਪੇ ਕਰ ਪਾਸਾਰ ਆਪੇ ਰੰਗ ਰਟਿਆ ਕੁਦਰਤ ਕੀ ਨਾ ਪਾਏ ਅਲਖ ਬ੍ਰਮਟਿਆ ਇਕਨੇ ਦੋਥਾ ਹੋ ਗਿਆ ਤਾਂ ਸਾਰਾ ਆਪੇ ਆਪੇ ਰੰਗਾਂ ਦੇ ਵਿੱਚ ਅਡਰ ਰਹਿਣਾ ਗਿਆਨ ਗਿਆਨ ਦਾ ਵੀ ਰੰਗ ਹੁੰਦਾ ਹੈ ਗਿਆਨ ਵਿੱਚ ਕੋਈ ਅਲਦਾਨੀ ਸਾਰਿਆਂ ਦਾ ਹੈਗਾ ਸਾਰੇ ਜਾਨਵਰਾਂ ਦਾ ਨਹੀਂ ਸਾਰੇ ਆਦਮੀਆਂ ਦਾ ਵੀ ਆਪੇ ਰੰਗ ਰੱਖਿਆ ਕੇ ਰੰਗ ਗਿਆਨ ਦਾ ਹੀ ਆਊਗਾ ਰੰਗ ਸਰੀਰ ਦਾ ਨਹੀਂ ਮਤਲਬ ਹੈ ਚੀਜ਼ ਦਾ ਮਤਲਬ ਤਾਂ ਕੋਈ ਨਹੀਂ ਕੁਰਬਾਨੀ ਆਪੇ ਰੰਗ ਪਾਸਾਰ ਆਪੇ ਰੰਗ ਰਟਿਆ ਕੁਦਰਤ ਕੀ ਮਨਾ ਪਾਏ ਅਲਖ ਬ੍ਰਹਮਟਿਆ ਹੁਣ ਅਲਖ ਜਦ ਆ ਗਿਆ ਬ੍ਰਹਮਟਿਆ ਆ ਗਿਆ ਬ੍ਰਹਮ ਆ ਗਿਆ ਤੇ ਪਿੱਛੇ ਰੰਗ ਵੀ ਤਾਂ ਉਹਦੇ ਹੀ ਹੋਣੇ ਕੁਦਰਤ ਕੀ ਮਨਾ ਪਰੇ ਪਰਟਿਆ ਆਪੇ ਵੱਡ ਪਾਤਸ਼ਾ ਆਪ ਵਜ਼ੀਰ ਟਿਆ ਤੂੰ ਕਮ ਹੈ ਅਥਾ ਹੈ ਬਿਆਨ ਤਾਂ ਪਰੇ ਤੋਂ ਪਰੇ ਨੇ ਪਰਟਿਆ ਆਪੇ ਵੱਡ ਪਾਤਸ਼ਾ ਆਪੇ ਵੱਡਾ ਪਾਤਸ਼ਾ ਬਣ ਜਾਂਦੇ ਆਪ ਵਜੀਰ ਵਜ਼ੀਰ ਵੀ ਆਪੇ ਹੀ ਹੁੰਦਾ ਵਜ਼ੀਰ ਵੀ ਤੂੰ ਹੀ ਹੁੰਦਾ ਉਹ ਵਜ਼ੀਰ ਜੀ ਵੀ ਉਹੀ ਹੈ ਜੋਤ ਸਾਰਿਆਂ ਚ ਰਾਜਾ ਜੀ ਵੀ ਉਹੀ ਜੋਤ ਹੈ ਸਾਰਿਆਂ ਚ ਜਿਵੇਂ ਜੁਹਾਂ ਕੇ ਬਖੇ ਇਸ ਇੱਕ ਜੋਤ ਹੈ ਵੜਾ ਹਨ ਕਾਟ ਹਨ ਕਾਟਵਾੜ ਹੋਤਾ ਜਗਰ ਤਵਸਤਾ ਕਿੰਨੇ ਗੁਣ ਕਿੰਨੇ ਨੇ ਉਹ ਕਿੰਨੇ ਨੇ ਸਵਾਲ ਇਸ ਗੱਲ ਦਾ ਉਹ ਗੁਣ ਗੁਣਾ ਤੇ ਖੜੀ ਹੈ ਗੱਲ ਜੋਤ ਹੋਈ ਹੈ ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ ਕੋਈ ਨਾ ਜਾਣੇ ਕੀਮ ਕੀਮ ਤਾਂ ਕੋਈ ਜਾਣਦਾ ਕੇਵੜ ਮਟਿਆ ਕਿਸ ਤਰੀਕੇ ਨਾਲ ਆ ਰਹੇ ਨੇ ਵਿੱਚ ਬਿਟੀ ਹੋਣਾ ਪਿਆ केवट पटिया सच्चा साहिब आप गुरुमुखी प्रगटया सच्चा साहिब भी आप हैं जे एक हैं, है तो सच्चा साहिब है जे दो ठां हैं तो माया विच है कि होई किते कि दाल है किते एक है किते बिरच तेरे स्टेजा च है माया च है मिट्टी चोड़ेया हैं सच्चा आप गुरुमुखी ਗੁਰਮੁਖ ਗਾਨੇ ਪ੍ਰਗਟ ਕੀਤਾ ਇਹ ਸੱਚਾ ਸਾਹਿਬ ਹੀ ਆਪੇ ਹੈ ਇਹ ਗੱਲ ਗੁਰਮੁਖ ਨੇ ਦੱਸੀ ਹੈ